ਸਲੋਹ ਮਹਾਨਾ ਚੌਥਾ ਹਨ ਮੁਖ ਪ੍ਰਾਣੀ ਮੁਗਧ ਹੈ ਨਾਮਹੀਣ ਪਰਮਾਏ ਬਿਨ ਗੁਰ ਮਨੁਵਾ ਨਾ ਟਿਕੈ ਫਿਰ ਫਿਰ ਜੁਨੀ ਪਾਇ ਹਾਂ ਹਾਂ ਜਿਹੜਾ ਅਨੋਖਾ ਉਹ ਦੋਹੀਏ ਹਾਂਜੀ ਸਕਦਾ ਉਹਦੇ ਦਾ ਗਵਾਰ ਹੈ ਉਹ ਨਾਮ ਤੇ ਵਰਨਾਂ ਜਾਂ ਤੇ ਵਾ ਮਤਲਬ ਗਿਆਨ ਲਵਾਂਗੇ ਅਰਥਰ ਗਿਆਨ ਦਾ ਬਦੋ ਹੈ ਅੱਛਾ ਜੀ ਜਿਹੜਾ ਉਹ ਨਾਮ ਆ ਉਹਦੇ ਵਿੱਚ ਤਾਂ ਸੁਭਾਜ ਜਾਂਦਾ ਦਾ ਉਦੋਂ ਤਾਂ ਜਿਹੜਾ ਮਨੁਹਾ ਨਾਟਕ ਹੈ ਜਾਂ ਮਨੁਹਾ ਨਾਟਕ ਹੈ ਕਹਾਂਗੇ ਤਾਂ ਨਾਮ ਦੱਸ ਗਿਆਨ ਲਵਾਗੇ ਕੁਰਬਾਨੀ ਦਾ ਗਿਆਨ ਦਾ ਵੱਡਾ ਬੰਦਾ ਹੈ ਨਾ ਨਾਨਕ ਨਾਮ ਤੇ ਤਾਂ ਜੀਵ ਇਹ ਪਹਿਲਾ ਨਾਮ ਗਿਆ ਗਿਆਰਵਾਲਾ ਰਾਮ ਨੂੰ ਮਾਰਦਾ ਉਹ ਜਿਹੜਾ ਆਮ ਆ ਉਹ ਵਿਚਲੀਟ ਕਰਦਾ ਆਪਣੇ ਉਹ ਜਨਮ ਤੋਂ ਦਸਾਂਤੀ ਬੰਦਦਾ ਨਾਮ ਪਦਾਰਥ ਕਹਿੰਦੇ ਹਾਂ ਜੀ ਹਾਂ ਉਹ ਠੀਕ ਹੈ ਜੀ ਬਿੰਨ ਗੁਰ ਮਨੂਆ ਨਾਟਕਾ ਫਿਰ ਫਿਰ ਫਿਰ ਫਿਰ ਪਾਉਂਦਾ ਬਲਟੇ ਕਹਦਾ ਜੀ ਠੀਕ ਹੈ ਜੋਤੇ ਧਾਰੀ ਹੈ ਸਰੀਰ ਜਿਹੜਾ ਬੰਦਿਆਂ ਮਨੁੱਖਾ ਅਸੀਂ ਜਨਮ ਲੈ ਆਉਣ ਟਿਕਾਉਣ ਵਾਸਤੇ ਲਿਆ ਹੈ। ਬਾਸ ਇਹਦੇ ਕਰਕੇ ਜੋ ਕੀਪੂ ਟਿਕਾ ਰਹੇ ਨੇ ਭਟਕਣ ਮੁੱਕ ਜਾ ਬੋਲਦੀ ਧਰਤੀ ਸਾਰੀਆਂ ਇਹ ਕਹਿ ਰਹੀਆਂ ਨੇ ਪਰ ਉਹ ਕਰ ਕੁਝ ਹੋਰ ਰਹੇ ਠੀਕ ਹੈ ਜੀ। ਹਰ ਪ੍ਰਭ ਆਪ ਦਿਆਲ ਹੋਏ ਤਾਂ ਸਤਗੁਰ ਮਿਲਿਆ ਆਏ। ਹਰ ਜਿਹੜਾ ਪ੍ਰਭ ਦਿਆਲ ਹੋਵੇ ਜੇ ਹਰ ਦਾ ਪ੍ਰਭ ਹਰ ਦਾ ਪ੍ਰਭ ਹੋਵੇ ਹਰ ਦਾ ਪ੍ਰਭ ਜਿਹੜਾ ਹੈਗਾ ਦਾ ਪ੍ਰਭ ਇੱਕ ਮੇਰਾ ਪ੍ਰਭ ਹੈ ਇੱਕ ਹਰ ਦਾ ਪ੍ਰਭ ਹੈ ਫਿਰ ਆਪਣਾ ਹੈ ਹਰ ਦਾ ਪ੍ਰਭ ਪਰਮੇਸ਼ਰ ਮੇਰਾ ਪ੍ਰਭ ਹਾਰ ਹੈ ਇੱਕ ਰਾਜਾ ਹੈ ਛੋਟਾ ਅਣਾਏ ਦੇ ਜਿਵੇਂ ਉਹਦੇ ਨੇ ਇੱਕ ਮਹਾਰਾਜ ਹੈ ਛਤ੍ਰਪਤੀ ਦੇ ਥੱਲੇ ਹੋਰ ਰਾਜੇ ਨੇ ਭਾਗ ਦਾ ਜਿਹੜਾ ਪ੍ਰਭ ਹੈ ਉਪਰਮੇਸ਼ਰ ਜੀ ਉਹਦੀ ਕਿਰਪਾ ਜਾਲ ਹੁੰਦੀ ਆ ਹਾਂ ਜੇ ਪੰਜ ਸਤਗੁਰੂ ਮਿਲਿਆ ਫਿਰ ਸਤਗੁਰੂ ਮਿਲੇ ਉਹ ਤਾਂ ਸਿਆਣਾਂ ਸਤਬੁਰ ਕਦੇ ਮਿਲਿਆ ਉਹ ਜਿਹੜਾ ਫੁਰਨਾ ਹੋ ਗਿਆ ਲੈ ਰੂੰ ਉਹ ਪਰਮੇਸ਼ਰ ਦਾ ਸੀ ਅਖਾਇਆ ਇਹਨੋਂ ਇਹਦਾ ਜੋੜਦੀ ਹੈ ਜਨ ਨਾਨਕ ਨਾਮ ਸਲਾਹੇ ਤੂੰ ਜਨਮ ਮਰਨ ਦੁਖ ਜਾਏ ਨਾ ਉਹ ਦਿੱਸਬ ਸਲਾਹ ਕਰਦੀ ਹੈ ਹੁਣ ਆਪਾਂ ਕੋਈ ਕਬਤੀ ਪਰਮੇਸ਼ਰ ਤੇ ਸਬ ਸਲਾਹ ਹੋ ਗਈ ਬਾਕੀ ਤੌਜ਼ੇ ਅਡਰ ਨੇ ਸਾਰੇ ਠੀਕ ਹੈ ਜੀ ਬਾਕੀ ਉਹਦੇ ਨੇ ਭਗਤ ਵੀ ਉਹਦੇ ਅਡਰ ਭਗਤ ਸਾਰੇ ਉਹਦੇ ਅਡਰ ਨੇ ਗੁਰਨਾਥ ਵੀ ਉਹਦੇ ਅਡਰ ਨੇ ਇਹ ਸੱਚ ਦਾ ਖਾਸ ਬ ਸੱਚੇ ਸੱਚ ਦੇ ਅਡਰ ਨੇ ਇਹ ਗੁਰੂ ਆਰ ਗੁਰੂ ਆਰ ਗੁਰ ਦਾ ਫਰਕ ਚੱਲਦਾ ਹੈ ਸੱਚਾ ਸੱਚਾ ਜਿਹੜਾ ਗੁਰੂ ਠੀਕ ਹੈ ਮੈਂ ਦੁਬਾਰਾ ਜਨਮ ਨਹੀਂ ਦੂਤਾ। ਹੋਈ। ਅੱਲਾ ਚੌਥਾ ਗੁਰਸਾਹਾਂ ਹੀ ਆਪਣਾ ਬਹੁਬਿਧ ਰੰਗ ਸੁਭਾਏ ਸਤਗੁਰ ਸੇਤੀ ਮਨ ਰੱਤਾ ਰੱਖਿਆ ਬੰਤ ਬਣਾਏ। ਗੁਰਸਾਹਾਂ ਹੀ ਆਪਾਂ ਜਿਹੜਾ ਦਾ ਮਨਸੂਨ ਤਾਂ ਕਹਿਆ ਆਪਣੇ ਗੁਰ ਦੇ ਪੈਰ ਚੱਲਦੇ ਅੰਦਰ ਸਾਡੇ ਸਭ ਦੇ ਅੰਦਰ ਠੀਕ ਹੈ। ਪਰ ਖਾਲ ਦਾ ਮੰਗਾਪ ਆਪਣੇ ਅੰਦਰ ਵਾਲੇ ਨਾਲ ਹੋਣਾ ਸਾਨੂੰ ਜਿਹੜਾ ਲਾਹ ਸਾਡੇ ਬੀਟਰ ਤਾਰ ਜਾਂਦੀ ਹੈ ਸਾਡੀ ਬੱਤੀ ਹੁੰਦਾ ਨਾਲੇ ਲੰਬੀ ਜਾਂਦੀ ਹੈ ਨਾ ਤਾਰ ਪੁੱਤੀ ਉਹ ਦੀ ਤਾਂ ਉਹ ਚੋ ਹੀ ਆ ਸਾਡੀ ਵੀ ਤਾਰ ਪਰ ਸਾਡੀਆਂ ਬੱਤੀਆਂ ਦਾ ਜਿਹੜੀ ਸਾਡੇ ਬੀਟਰ ਚੋਂ ਨਾ ਕੇ ਬਿਜਲੀ ਆਉਂਦੀ ਉਹਦੇ ਨਾਲ ਉਹਦੇ ਨਾਲ ਸੰਬੰਧ ਪਹਿਲਾਂ ਉਹਦਾ ਫਿਰ ਗਾਹਾਂ ਸੰਬੰਧ ਹੈ ਉਹਦਾ ਬਿਲਾਈ ਦਾ ਸੰਬੰਧ ਹੈ ਉਹ ਪਸ ਇਦਾਂ ਹੀ ਵਰਕੇ ਹੁਣ ਅੱਲ ਆਪਾਂ ਠੀਕ ਹੈ ਫਿਰ ਤਾਂ ਆਪਾਂ ਕਹਿ ਸਕਦੇ ਆ ਜੀ ਵੀ 220 ਚਾਹੀਦੀ ਸਾਨੂੰ ਜਿਹੜੀ ਜਿਹੜੀ ਪਾਖੜੇ ਤੋਂ ਆਉਂਦੀ ਹੈ ਉਹ ਉਹ ਵਾਲੀ ਤਾਂ ਹੁੰਦੀ ਹੈ ਉਹ ਤਾਂ ਫਿਰ ਸਾਡੇ ਫਿਰ ਸਭ ਕੋਲ ਲਾ ਦੂਗੀ ਹਾਂਜੀ ਉਹ ਸਿੱਧਾ ਸਿੱਧਾ ਸਿੱਧਾ ਉਹਦੇ ਨਾਲ ਹੀ ਕਨੈਕਸ਼ਨ ਕਰ ਸਕਦੇ ਪਪਾਗਤਾ ਨੂੰ ਉਹੀ ਆਈ ਸੀ ਉਹਨਾਂ ਨੇ ਫਿਰ 220 ਬਣਾ ਕੇ ਸਾਨੂੰ ਦੇ ਦਿੱਤੀ ਹੈ ਜੀ ਹਾਂ 220 ਬਣਾ ਕੇ ਦਿੱਤੀ ਉਹ 220 ਚੱਲ ਰਿਹਾ ਅਸੀਂ ਇੱਧਰ ਲਾ ਪਹਿਲਾਂ ਸਾਡੇ ਇਹਦਾ ਬਹੁਤ ਚੱਕਰ ਜੋਗੇ ਦੀ ਹੂੰ ਹੂੰ ਸਮਝ ਆ ਰਹੀ ਜਿੰਨਾ ਕ ਬਹੁਤ ਚੱਕਰ ਜੋਗੇ ਉਹਨਾਂ ਬਹੁਤ ਟੈਨ ਸਤਗੁਰ ਸੇਤੀ ਮਨ ਰਤਾ ਰੱਖਿਆ ਬੰਤ ਬਣਾਈ ਗੋਬੀ ਦੀ ਰੱਕੀ ਹਾਂਜੀ ਬਹੁਤ ਬਿਲੀਆਂ ਬਹੁਤ ਰੰਗੀਆਂ ਮਸਾਲਾਂ ਦੇ ਦੇਖੇ ਦੁਨੀਆ ਚ ਪ੍ਰਕਾਰ ਨਾਲ ਸਮਝਾ ਸਮਝਾ ਕੇ ਸਾਰੀ ਸੱਚ ਦੇ ਰਾਹੀਂ ਅਸਲ ਚ ਦਿਲahari ਸੱਚ ਨੂੰ ਸਮਝਾਇਆ ਠੀਕ ਹੈ ਉਹ ਦਾ ਮਤਲਬ ਇਹ ਈ ਹੈ ਬਿਦੀ ਤੇ ਤੇ ਕੋਈ ਸਮਝ ਸੱਚ ਦੀ ਹੂੰ ਹੂੰ ਬਿਧੀ ਤਾਂ ਛੁੱਟਣ ਦੀ ਕੋਈ ਸਮਝ ਆਈ ਐ ਪਰ ਅਸੰਸਾਰ ਦੇ ਮਸਾਲਾ ਬਹੁਤ ਕੀ ਹੁੰਦੇ ਸਾਰੀ ਸੱਚ ਦੀ ਕੋਈ ਨਹੀਂ ਰਹਾ ਬਹੁਤ ਪ੍ਰਕਾਰ ਨਾਲ ਸਮਝਾਇਆ ਗੁਰਬੰਦੀ ਦੇ ਗੱਲ ਬੁੱਝਣ ਵਾਲੀ ਐ ਦੱਸਣ ਵਾਲੀ ਦੀ ਦੱਸ ਤੋ ਸਿੱਧੀ ਜਾ ਸਕਦੀ ਦੱਸਣ ਦੇ ਵਿੱਚ ਫਰਕ ਰਹੀ ਜਾਣਾ ਰਹੀ ਜਾਣਾ ਰਹੀ ਜਾਣਾ ਬਹੁਤ ਪ੍ਰਕਾਰ ਨਾਲ ਦੱਸਿਆ ਤਾਂ ਕਿ ਬੁੱਝੇ ਬੁੱਝਣ ਦੇ ਜਿਹੜੇ ਤੋਂ ਜਿਹੜੇ ਕੀਤਾ ਹਾਂਜੀ ਜਿਵੇਂ ਆਪਾਂ ਨੇ ਆਹਾਰ ਦੀ ਗੱਲ ਕਰਤੀ ਭਾਵੇਂ ਤੁਸੀਂ ਨਾਉ ਤਾਰ ਹੈ ਨਾਉ ਗੱਲ ਹੈ ਹੁਣ ਬਸ ਇੱਕ ਇਸ਼ਾਰਾ ਕੀਤਾ ਉਹ ਤੁਮ ਇਹਦੇ ਜੋ ਭੁੱਜਦੇ ਹਾਂਜੀ ਠੀਕ ਜੀ ਦਾ ਲੱਗਿਆ ਗਿਆ ਨਾ ਪਰ ਕਿਹ ਬੰਤ ਬਾਇਓ ਦੀ ਗਈ ਆਉਣਾ ਸਰੂਪ ਜਿਸਾ ਉਹਦਾ ਬਖੂਜਲਾ ਹੋ ਗਿਆ ਤੇਵਾ ਸਲਾਹੀ ਰੱਜੀ ਰਜਈ ਹਰ ਪ੍ਰੀਤਮ ਚਿਤ ਲਾਏ ਜੇ ਕੋ ਸਲਾਹੀ ਨਾ ਰਜਈ ਵਾ ਜਿਹੜੀ ਉਹ ਸੂਤਰਾਤਮ ਸਲਾਹੀ ਸਲਾਹ ਕਰਤੋ ਰਜਦੀ ਦੀ ਹੂ ਬਹੁਤ ਸਲਾਹ ਕਿਉਂਕਿ ਉਹਦੇ ਰੰਗਾਂ ਦਾ ਹੈ ਜੋ ਜੋ ਗਿਆਨ ਹੁੰਦਾ ਹਾਂ ਇਹ ਦੇਖਾ ਜਦੋਂ ਗਿਆਨ ਵੱਧਦਾ ਤਾਂ ਉਹ ਜਿਹੜਾ ਰੂਪ ਵੱਡੇ ਤੋਂ ਵੱਡਾ ਦਿਖੀ ਜਾਂਦਾ ਠੀਕ ਹੈ ਕੋਈ ਬਸਾਲ ਦਿੰਦੇ ਹੁੰਦੇ ਨੇ ਕਹਿੰਦੇ ਉਹ ਓਥੋਂ ਬਹੁਤ ਦੂਰੋਂ ਨਹੀਂ ਮੈਂ ਤਾਂ ਮੇਰੇ ਵੀ ਜਦੋਂ ਉੱਚਾ ਹਾਂ ਜਦੋਂ ਨੇੜੇ ਆਈ ਗਿਆ ਉਹਨਾਂ ਪਹਾੜ ਬੱਤਾ ਹੋਈ ਗਿਆ ਉਹ ਛੋਟਾ ਹੋਈ ਗਿਆ ਠੀਕ ਹੈ ਐਵੇਂ ਜਿਹੜਾ ਉਹ ਆਪਣੇ ਆਪ ਨੂੰ ਗੁਰੂ ਬੋਲ ਲੈਂਦਾ ਰਹੇ ਅਕੈ ਗੁਰੂ ਹੁੰਦਾ ਸਭਾ ਅਗਿਆਨ ਹੀ ਉਹਦਾ ਨਹੀਂ ਇਹ ਗੱਲ ਜਿਉ ਜਿਉ ਗਿਆਨ ਹੋਈ ਜਾਂਦਾ ਹੈ ਵੱਡੇ ਦਾ ਸੱਚ ਦਾ ਆਪਣਾ ਆਪਾ ਵੱਡਾ ਦੇਖੀ ਜਾਂਦਾ ਕਹਿੰਦੇ ਜਲਾ ਚਾ ਜਾਂਦੇ ਬਾਹਰ ਫਿਰ ਉਹ ਤਾਂ ਮੈਂ ਮੈਂ ਤਾਂ ਕੁਝ ਵੀ ਨਹੀਂ ਹੱਤ ਆਇਆ ਤੇ ਉਹਨਾਂ ਕੋਲੇ ਕੁਛ ਨਹੀਂ ਆ ਜਾਂਦਾ। ਭਾਜੀ। ਕਿ ਜੇਵਾਸਾ ਲਾਹੀ ਨਾਰਜ ਜੀ ਹਰ ਪ੍ਰੀਤਮ ਚਿਤ ਲਾਏ। ਕਿਤੇ ਜਿਹਦੀ ਹਰ ਪ੍ਰੀਤਮਾ ਦਾ। ਉਹ ਨਹੀਂ ਸਲਾਹ ਸਿਰਫ ਸਲਾਹ ਤੁਰ ਨਹੀਂ ਲੱਗਿਆ ਉਹ ਰਹਿ ਜਗੇ। ਅੱਛਾ ਨੇ ਨੇਤ ਨੇ ਤੁਖ ਜਿਹੜਾ ਗਿਆਨੀ ਹੋਇਆ ਉਹਨੇ ਬਿਆਨ ਤੇ ਬਿਆਨ ਤੇ ਕਹਿ ਕੇ ਆਖਰ ਚੁੱਪ ਕਰ ਕਰ ਤਵੀ ਜਦ ਬਾਸ਼ਾ ਨੇ ਅਸਾਲ ਉਸਤ ਦੇ ਵਿੱਚ ਪਿਛਲਾ ਛੰਦ ਭੁੱਲਾ ਛੱਡਿਆ ਹੋਇਆ ਬਧੂਰਾ ਉਹ ਕਹਿੰਦਾ ਉਸਤ ਆਹ ਵੇਰੀ ਤਾਂ பச ਹੋ ਗਈ ਉਸਤ ਕਰਦੇ ਮੈਂ ਤਾਂ ਦਿੱਕੇ ਦਰਸਾ ਸਕਦਾ ਹਾਂ ਤਾਂ ਕੋਈ ਫਾਇਦਾ ਨਹੀਂ ਹੈ ਇਹ ਗੱਲ ਮੁਕੜੀ ਉਹ ਵੀ ਪੀ ਰੱਖੀ ਆ ਆਹੀ ਗੱਲ ਐ ਜੀ ਰੱਜੀ ਜੇ ਦੀ ਪ੍ਰੀਤ ਲੱਗੀ ਉਹਦੀ ਡੀ ਰਜ ਤੇ ਰਜ ਗਈ ਛੱਡ ਦੇਣਾ ਜਾਂ ਰਜਣਾ ਨਾ ਦਾ ਦੁੱਧ ਗਿਆ ਉਹ ਤਾਂ ਛੱਡ ਦੇਣਾ ਗਾਇਨ ਦਾ ਦੁੱਧ ਤੈ ਹੋਵੇ ਚੱਤ ਅਰਬਿਸਰ ਸਦਾ ਖਾਰੀ ਜੇ ਬਿਸਰ ਗਿਆ ਖਾਰੀ ਕਿਰੋ ਜਣੀ ਇਸ ਕਰਕੇ ਇਹਦੀ ਭੁੱਖ ਬੜੀ ਰਹਿਣੀ ਚਾਹੀਦੀ ਹੈ ਵੀ ਜੀ ਜੀ ਨਹੀਂ ਰਜਿਤ ਚਾਹੀਦੀ ਕੀ ਮਨ ਭੁਖ ਹ ਮਨ ਤ੍ਰਿਪਤ ਹਰ ਰਸ ਖਾਈ ਭੁੱਖ ਜਿਹੜੀ ਹੈ ਕੀ ਭੁੱਖ ਹਾਂਜੀ ਭੁੱਖ ਦਾ ਕੋਈ ਇਲਾਜ ਨਹੀਂ ਭੁੱਖ ਦੀ ਕੋਈ ਸੀਮਾ ਨਹੀਂ ਹੁੰਦੀ ਹੂੰ ਲੋੜ ਦੀ ਸੀ ਮਾਹ ਭੁੱਖ ਦੀ ਕੋਈ ਸੀਮਾ ਨਹੀਂ ਅਸੀਂ ਲੋੜ ਨੂੰ ਭੁੱਖ ਕਹਿਣ ਲੱਗੇ ਠੀਕ ਹੈ ਜੀ ਇਹ ਲੋਰ ਨੂੰ ਭੁੱਖ ਬਣਾ ਲਿਆ ਭੁੱਖ ਦਾ ਕੋਈ ਇਲਾਜ ਨਹੀਂ ਭੁੱਖਾ ਭੁੱਖ ਨਾ ਉਤਰੇ ਮਾਇਆ ਦੀ ਜੇ ਭੁੱਖ ਹੋਵੇ ਉਹਦੀ ਵੀ ਭੁੱਖ ਉਤਰ ਸਕਦੀ ਹੈ ਸਾਰੀ ਮਾਇਆ ਤੋਂ ਤਰਨਾ ਲੋਕਾਂ ਦੀ ਮਾਇਆ ਉਹਨੂੰ ਦੇ ਦੀਏ ਜੇ ਜੇ ਭੁੱਖ ਹੋਵੇ ਨਾ ਕਿ ਇਹ ਵੀ ਨਹੀਂ ਉਤਰਦੀ ਧਾਮ ਦੀ ਭੁੱਖ ਚਾਹੀਦੀ ਹੈ ਮਾਇਆ ਦੀ ਭੁੱਖ ਦਈ ਚਾਹੀਦੀ ਉਹ ਖਾਸੀ ਹੁੰਦੀ ਹੈ ਠੀਕ ਹੈ ਸਹੀ ਕੀ ਲੱਗਾ ਭੁੱਖ ਉਸ ਨੂੰ ਖਰੇ ਖਾਇ ਚੱਲ ਗਿਆ ਦੁੱਖ ਤੇ ਚਾਹੀਦੀ ਹੈ ਤੇ ਲਗਣੀ ਚਾਹੀਦੀ ਆ ਆਪੋ ਕੇ ਜਾਣੀ ਚਾਹੀਦੀ ਹੈ ਉਹ ਦੁੱਖ ਲਗਣੀ ਚਾਹੀਦੀ ਹੈ ਠੀਕ ਮਾਇਆ ਦੀ ਭੁੱਖ ਗਵਾਉਂਦੀ ਹੈ ਤ੍ਰਿਸ਼ਨਾ ਠੀਕ ਹੈ ਫੌੜੀ ਫੱਚ ਕੁਦਰਤ ਜਾਣੀ ਦਿਨ ਰਾਤ ਜਿਨ ਬਣਾਇਆ ਸੋ ਸਤ ਸਲਾਹੀ ਸਦਾ ਖਦਾ ਸੱਚ ਸੱਚੇ ਕੀਆ ਸੱਚਰ ਸੱਚੇ ਨੂੰ ਕੁਦਰਤ ਦੇ ਵਿੱਚ ਜਾਣਿਆ ਜਾ ਸਕਦਾ ਹੈ। ਅੱਛਾ ਜੀ। ਅਸਲ ਜਿਹੜੀ ਕੁਦਰਤ ਦੇ ਵਿੱਚ ਕਾਦਰ ਵਸਦਾ। ਹੂੰ ਹੂੰ। ਜੋ ਕੁਦਰਤ ਦੇ ਵਿੱਚ ਕਾਦਰ ਵਸਦਾ। ਕਾਦਰ ਦੀ ਕੁਦਰਤ ਹੈ। ਹੂੰ ਹੂੰ। ਕਾਦਰ ਸੱਚ ਹੈ। ਸੱਚਾ ਦਾ ਉਹਦੇ ਦੁੱਥਾਂ ਨਾਲ ਸਾਨੂੰ ਸੁਣਿਆ ਹੋਣਾ। ਜਿਹੜਾ ਕਹਿ ਰਿਹਾ ਨਾ ਵਿੱਚ ਕੁਦਰਤਾਰ ਪਰਮ ਵਸੇ ਜੀਓ। ਉਹ ਸੱਚ ਹੈ ਚਲੋ ਘਾਰੇ ਆਵੇ ਕੁਦਰਤ ਤੁਸੀਂ ਸਿਆਚ ਜਲਦੀ ਇੱਕ ਬ੍ਰਹਮਾ ਇੱਕ ਵਿਸ਼ਨੂੰ ਸ਼ਿਵ ਜੀ ਉਹ ਝੂਠਾ ਅੱਛਾ ਉਹ ਸੱਚ ਹੈ ਜਿਹੜਾ ਉਹ ਤੇਸਾਂ ਡਿਵਾਈਡ ਕਰਕੇ ਦੱਸਦਾ ਨਾ ਕਿ ਜੰਮ ਪੈਨਾ ਕਰਨ ਵਾਲਾ ਹੋਰ ਹੈ ਪਾਉਣਾ ਕਰਨ ਵਾਲਾ ਹੋਰ ਹੈ ਦਿਵਾਰ ਕਰਨ ਵਾਲਾ ਹੋਰ ਹੈ ਤੇ ਤੁਸੀਂ ਐਂਡ ਕਰਕੇ ਦੱਸਦਾ ਉਹ ਨਹੀਂ ਕਰ ਚਾਹੇਗਾ ਠੀਕ ਕਹਿੰਦਾ ਇੱਕ ਇੱਕ ਹੀ ਜੁਝਾਰੀ ਹੈ ਉਹ ਹੀ ਇੱਕ ਭੰਡਾਰੀ ਹੈ ਉਸ ਉਹੀ ਇੱਕ ਸਹਾਰ ਕਰਨ ਵਾਲਾ ਉਹ ਸੱਚ ਹੈ ਹੋਜੀ ਠੀਕ ਹੈ ਸੱਚ ਸੱਚਾ ਕੁਦਰਤ ਜਾਣੀ ਹੈ ਦਿਨ ਰਾਤ ਜਿਨੀ ਬਣਾਇਆ ਸੂਰਜ ਰਚਨਾ ਬਣਾਈ ਹੈ ਠੀਕ ਹੈ ਸਹੀ ਸੋ ਸੱਚ ਸਲਾਹੀ ਸਦਾ ਸਦਾ ਸੱਚ ਸੱਚੇ ਕੀਆ ਸੋ ਸੱਚ ਕਹਿ ਕੇ ਕਜੀ ਦੀ ਪਰਵਾਸ ਆਪਣੀ ਆਪਣੀ ਠੀਕ ਹੈ ਸਾਰੇ ਧਰਮਾਂ ਪਿਆਰਾਂ ਸੱਚਾ ਸਾਬਤ ਕਰਦੇ ਕਿਹਾ تھا ਕਿ ਜੋ ਸੱਚ ਉਹ ਸੱਚ ਠੀਕ ਹੈ ਜਿਹੜੇ ਹਾਂ ਮਾਇਆ ਕੀ ਨਾ ਬਣਾਈਆ ਮਾਇਆ ਤਾਂ ਆਪਰੇ ਬਣਾਈ ਹੈ ਠੀਕ ਹੈ ਜਿਹਨੇ ਪੂਰਤੀ ਬਣਾਈਆ ਪੂਰਤੀ ਤਾਂ ਬਾਹਰ ਹੁੰਦਾ ਆਪ ਜਿਹੜੇ ਬੋਲ ਕੇ ਖੜਿਆ ਉਹ ਤੋਂ ਬਾਹਰ ਆ ਪੂਰਤੀ ਵਿੱਚ ਨਹੀਂ ਹੈਗਾ ਉਹ ਕੱਢਣ ਵਾਲਾ ਬਣਾਉਣ ਵਾਲਾ ਈ ਉਹਦਾ ਪੂਰਤੀ ਵਿੱਚ ਠੀਕ ਜੇ ਮੂਰਤੀ ਦੇ ਵਿੱਚ ਕੁਝ ਹੈ ਵੀ ਤਾਂ ਮੂਰਤੀ ਬਣਾਉਣ ਵਾਲੀ ਸ਼ਕਤੀ ਤੋਂ ਉਹ ਸ਼ਕਤੀ ਘੱਟ ਹੈ ਜਿਹਨਾਂ ਮੂਰਤੀ ਘੜੀ ਹੈ ਜੇ ਜਿਹੜੀ ਉਹ ਸ਼ਕਤੀ ਹੈ ਉਹਦੇ ਨਾਲ ਮੂਰਤੀ ਬਿਜਲੀ ਸ਼ਕਤੀ ਫਿਰ ਜਿਹੜੀ ਹੈ ਛੋਟੀ ਹੋ ਸਕਦੀ ਹੈ ਵੱਡੀ ਵੀ ਹੋ ਸਕਦੀ ਬਣਾਉਣ ਵਾਲਾ ਵੱਡਾ ਹੁੰਦਾ ਸੁਪਰੀ ਘੂਤ ਫਿਰ ਦਾਦਾ ਜਾਨਪੂਤ ਜਾਨਪੂਤ ਪੂਤ ਦਾ ਜਨਪਤਾ ਜਾਨਦਾ ਹੁੰਦਾ ਪਿਤਾ ਦਾ ਜਨ ਪੁੱਤ ਨਹੀਂ ਜਾਣ ਸਕਦਾ ਹਾਂਜੀ ਹਾਂਜੀ ਸੋ ਸਤ ਸਲਾਹੀ ਸਦਾ ਸਦਾ ਸੱਚ ਸੱਚੇ ਕੀਆਂ ਵਡਿਆਈਆਂ ਸੱਚ ਸੱਚੇ ਕੀ ਉਹ ਸੱਚ ਦੇ ਸੱਚ ਦੀਆਂ ਵਡਿਆਈਆਂ ਕਰਦੀ ਉਹਦੇ ਸੱਚ ਨਹੀਂ ਵਡਿਆਈਆਂ ਸੱਚੇ ਨੇ ਕੀਤੀ ਉਹਦੇ ਜਿਹੜੇ ਸੱਚੇ ਨੇ ਉਹ ਸੱਚ ਦੀਆਂ ਵਡਿਆਈਆਂ ਕਰਦੇ ਨੇ ਉਹ ਸੱਚੀਆਂ ਵਡਿਆਈਆਂ ਕਰਦੇ ਨੇ ਗੁਰਬਾਣੀ ਉਹ ਸੱਚੀਆਂ ਵਡਿਆਈਆਂ ਗੱਲ ਜਿਹੜੇ ਕਰਨ ਰਾਤ ਬਣਾਏ ਨੇ ਸਾਥ ਸੱਚੀਆਂ ਕਿਹ ਮੜਿਆਈਆਂ ਸੱਚੀਆਂ ਵਡਿਆਈਆਂ ਤਾਂ ਸੱਚ ਨੇ ਦੁਨੀਆਂ ਸੱਚੇ ਨੇ ਨਾਨਕ ਨੇ ਜਿਹੜੀ ਵਡਿਆਈ ਕੀਤੀ ਉਹ ਤਾਂ ਸੱਚ ਹੈ ਜੇ ਸੱਚੇ ਨੇ ਵਡਿਆਈ ਕੀਤੀ ਉਹਦੇ ਵਿੱਚ ਸੱਚ ਨਹੀਂ ਹੈ ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਰੇ ਨਾ ਪਾਈ ਵੇਦ ਕਰਕੇ ਸਾਲਾਂ ਦੇ ਸੱਚ ਸਾਲਾ ਸੱਚ ਸੁਣਾਉਣਾ ਰਹੀ ਵੀ ਹੁਣ ਵੀ ਸਾਲਾ ਉਸੇ ਸੱਚ ਦੀ ਜਿਹੜੇ ਦਿਨ ਰਾਤ ਬਣਾਏ ਨੇ ਸਾਲਾਂ ਇਹ ਸੱਚ ਸਾਲਾ ਸੱਚ ਸੱਚ ਕੀਮਤ ਕਿਨੇ ਨਾ ਪਾਈ ਆ ਦੀ ਕੀ ਨੇ ਪਾਈ ਉਹ ਅਸਲੀ ਹੋਏ ਸੱਚ ਉਹਦੀ ਮਿਲਿਆ ਪੂਰਾ ਸਤਿਗੁਰੂ ਤਾਂ ਹਾਜ਼ਰ ਨਜ਼ਰੀ ਆਈ ਜਾ ਦੇ ਸਤਿਗੁਰੂ ਕੋ ਪੂਰਾ ਮਿਲ ਗਿਆ ਸਰਬ ਵਿਆਪੀ ਦਿਸ ਪਿਆ ਸੱਚ ਉਹ ਸੱਚ ਦੀ ਜਦ ਸਮਝ ਆ ਗਈ ਨੇ ਕਹਿ ਲੋ ਫਿਰ ਉਹ ਸੱਚ ਦੀ ਸਮਝ ਆਉਂਦੀ ਆ ਜਦ ਕੋਈ ਪੂਰਾ ਸਤਿਗੁਰੂ ਗਿਲਦੀ ਜੇ ਸਤਿਪੁਰਖ ਨੂੰ ਜਾਣ ਲਿਆ ਹੋਵੇ ਸੱਚ ਗੁਰਮੁਖ ਜਿਣੀ ਸਲਾਹਿਆ ਤੈਨਾ ਭੁੱਖਾਂ ਸਭ ਗਵਾਈਆਂ ਜਿਹੜੇ ਗੁਰਮਖਨੇ ਸੱਚੇ ਗੁਰਮਖੀ ਜਿਹਨਾਂ ਗੁਰਮ ਆਹਣ ਸਾੱਚੇ ਦੂਤ ਸੁਲਾ ਹੈ ਨੂੰ ਕਵਾਇਆ ਉਹਨਾਂ ਕੋਈ ਭੁੱਖ ਨਹੀਂ ਰਹੀ ਸੰਸਾਰ ਦੇ ਵਿੱਚ ਕਿਸੇ ਵਟਿਆਈ ਦੀ ਜਾਂ ਕਿਸੇ ਬਾਜ਼ਾਰਤ ਦੀ ਤਰਸ ਨਹੀਂ ਸੀ ਉਹਨੇ ਕਿਾਰੇ ਬਾਜ਼ਾਰਤ ਮੜੇ ਕੋਈ ਭੁੱਖ ਨਹੀਂ ਦਈ ਇਹ ਜਿਹੜੀ ਪੰਕਤੀ ਆ ਇਹ ਫਿਰ ਜਪੀ ਸਾਹਿਬ ਜਿਆਦਾ ਪਾਮ ਮੂਲ ਮੰਤਰ ਤੋਂ ਬਾਅਦ ਪੜਦੇ ਸ਼ਲੋਕ ਦੇ ਨਾਲ ਏ ਮਿਲਦਾ ਕਿ ਉਹ ਉੱਥੇ ਜਦੋਂ ਭੁੱਖਾ ਭੁੱਖਣਾ ਉਤਰੀ ਉਹ ਇਹ ਕਹਿਣਾ ਚਾਹੁੰਦੇ ਆ ਕਿ ਨੂੰ ਨਿਸ਼ਲਾ ਆਇਆ ਭੁੱਖ ਉਤਰੀ ਹਾਂਜੀ ਬਿਲਕੁਲ ਮਾਇਆ ਦੇ ਭੁੱਖੇ ਭੁੱਖ ਤਾਂ ਝੋੜਦੀ ਆ ਹਾਂਜੀ ਭੁੱਖੇ ਦੀ ਹੈ ਠੀਕ ਹੈ